ਤਲੁਕ ਮਹੱਲਾ ਤੀਜਾ ਜਿਨ ਕੋ ਸਤਗੁਰ ਭੇਟਿਆ ਤੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੇ ਤੇ ਜੇ ਇੱਕ ਵਾਰ ਵਿੱਚ ਟੋ ਹੋ ਗਏ ਨਾ ਬੱਲੇ ਸਤਗੁਰ ਨਾਲ ਜਿਹਨਾਂ ਦਾ ਬੁਲਾਪ ਹੋ ਗਿਆ ਭੇਟਿਆ ਦਾ ਬੁਲਾਪ ਕੀ ਕਰਦੇ ਨੇ ਅਜੇ ਇਹ ਗੁਰਬਾਣੀ ਦੇ ਵਿੱਚ ਦੱਸਿਆ ਇਹ ਕਮਾਈ ਕਰਦੇ ਇਹ ਹਰ ਨਾ ਇੱਕ ਵਾਰ ਵਿੱਚ ਹੋਏ 그러면은 ਇਹਦੀ ਕਮਾਈ ਦੀ ਦੱਸਦੇ ਭਾਈ ਵਰਦੂ ਦੇ ਪਾਸੇ ਤੋਂ ਕਹਿਣ ਨੂੰ ਆਇਆ ਵੱਲੂ ਜਦ ਮਾਇਆ ਵਾਲੋਂ ਕੋਲ ਖੇਚਣ ਦੇ ਹਰ ਜਾਂਦੇ ਕਮਾਈ ਉਹ ਤੋਂ ਗੱਲ ਸ਼ੁਰੂ ਹੁੰਦੀ ਮਾਇਆ ਦੀ ਕਮਾਈ ਕਰਦਾ ਪਰ ਉਹ ਸੰਜਮ ਦੇ ਵਿੱਚ ਰਹਿ ਕੇ ਕਰਦਾ ਸੱਜੂ ਨਾਮਦਾਇਆ ਸੰਜਮ ਦੇ ਰਹਿ ਕੇ ਕਰਦਾ ਮਾਇਆ ਦੀ ਵੀ ਕਰਦਾ ਸੰਜਮ ਦੇ ਵਿੱਚ ਰਹੇ ਜਿਹੜੇ ਸਤ ਸੰਤੋਖ ਦੇ ਡੈਰੇ ਨੂੰ ਸੰਜਮ ਕਹਿੰਦੇ ਨੇ ਸਤ ਸੰਤੋਖ ਦਾ ਡੈਰਾ ਜਿਹੜਾ ਨੂੰ ਉਹਦੇ ਵਿੱਚ ਰਹਿ ਕੇ ਮਾਇਆ ਦੀ ਕਾੜ ਕਰਦਾ ਸਤ ਸਤ ਮੁਗਦੇ ਧਾਇਰੇ ਦੇ ਵਿੱਚ ਰਹਿ ਕੇ ਕਰ ਧਾਇਰੇ ਤੋਂ ਨੇ ਦੋਖੀ ਜੋ ਰਹਿੰਦੇ ਨੇ ਫਿੜ ਹਰ ਨਾਮ ਸਿੱਧ ਕੇ ਬਸਿਆ ਉਹਨਾਂ ਦੇ ਹਰ ਨਾਮ ਬਸ ਜਾਂਦਾ ਉਹਨਾਂ ਦੇ ਅੰਦਰ ਗਿਆਨ ਜਿਹੜਾ ਹੈਗਾ ਵਰ ਬੁਰੀ ਦਾ ਇਹ ਟਿੱਕ ਜਾਂਦਾ ਇਸ ਕਰਕੇ ਚਿੱਟਾ ਮੁਕਤ ਹੋ ਜਾਂਦਾ ਬਾਹੇ ਕਿ ਆ ਜਾਂਦੇ ਨੇ ਪਰ ਬੰਨ ਵਾਗ ਜਾਂਦਾ ਸ਼ਬਦ ਕੌਣ ਆਇਆ ਉਹ ਸੱਚਾ ਸ਼ਬਦ ਆਹ ਜਿਹੜਾ ਨਾ ਕੋਈ ਫਸੋ ਹੁਕਮ ਨੇ ਤੇ ਕਿਸੇ ਬੋ ਠੀਕ ਹੈ ਜੀ ਕੁੱਲ ਉਦਾਹਰਣ ਆਪਣਾ ਮੋਖ ਪਦਵੀ ਆਪੇ ਪਾਹੇ ਪਰਮ ਬ੍ਰਹਮ ਤਿੰਨ ਕੋਸ ਜੋ ਗੁਰ ਜਨ ਪਾਹੇ ਕੋ ਲੋੜ ਆੜੇ ਆਪਣਾ ਆਪਣੇ ਕੋ ਨੂੰ ਆਧਾਰ ਦੇ ਬਿਲਕੁਲ ਜਿਹੜੀ ਮਤਮਾਤਾ ਸੰਤੋਖਤ ਤੇ ਦਾ ਹੀ ਭਾਗ ਕਰਦੇ ਕੁਝ ਦੇ ਦੂਈ ਮਤਾਲੇ ਨਾਲ ਗੱਲ ਸੋਲਦੀ ਹੈ ਲਫਾ ਹੈ ਸੰਸਾਰ ਦੇ ਵਿੱਚ ਸਾਡੀ ਕੋਲ ਇੱਕੋ ਹੀ ਹੈ ਗੁਰਬਾਣੀ ਦੇ ਸਾਥ ਤੇ ਇੱਕ ਪਛਾਇਤ ਕੇ ਅਵਧ ਉਹ ਤਾਂ ਸਾਰਿਆਂ ਦਾ ਹੀ ਉਧਾਰ ਕਰਦੇ ਉਹਨਾਂ ਦਾ ਇਰਾਦਾ ਤਾਂ ਸਾਡੀ ਸਾਰੀ ਸ੍ਰੀ ਸ਼੍ਰੀ ਦਾ ਉਧਾਰ ਕਰਨ ਲਈ ਹੈ ਜਿਵੇਂ ਸੱਚੀ ਦੇ ਆਦਮੀ ਦੇ ਕਰ ਸਕਦਾ ਹੋ ਸਕਦਾ ਉਹ ਹੋ ਸਕਦਾ ਉਹ ਥੱਲੇ ਨੇ ਕੋਲੋਂਾਰੇ ਆਪਨ ਅਪਨ ਸਾਰੇ ਗੋਲ ਦਾ ਉਦਾਰ ਚਉਂਦੇ ਰਹੇ ਇੱਕ ਪਤਾ ਹੈ ਕਿਸਕੇ ਅੰਬਾਰ ਤੋਂ ਸਾਰੇ ਰਿੱਤੀ ਦਾ ਉਨ ਲੋਕਾਂ ਦਾ ਚਉਂਦੇ ਰਹੇ ਇਹ ਜੇਕਰ ਕੇ ਗੋਲਨਾਥ ਦੇਵੀ ਸਾਰੇ ਕੋ ਬੇਫਰੇ ਜਦੋਂ ਦਾ ਉਦਾਰ ਹੋ ਜੇ ਆਪ ਉਹ ਪਰਬੀ ਪਾਈ ਹੋਈ ਹੁੰਦੀ ਸੁਖ ਤੋਂ ਸਭ ਆਖ ਬਾ ਮੁਕਤ ਹੋ ਤੇ ਧੀ ਜੀ ਤੋਂ ਮੁਕਤ ਹੋ ائر غروز کا غروز لوگ موٹوٹ بیکار غروز سب ساری کی جانوں بھکت تو بنا سے لو دل غروز کا قابو غروز لوگ موٹ کچھ نہیں رہن اندر ایک ਬਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਭਾਇ ਜੋ ਗੁਰ ਚਰਣੀ ਜਨ ਪਾਹੀਂ ਬਾਰ ਬ੍ਰਹਮ ਵੀ ਉਹ ਉੱਤੇ ਸੰਤੁਸ਼ਟ ਹੁੰਦਾ ਉਹ ਬਾਰ ਬ੍ਰਹਮ ਦੀ ਸਾਰੇ ਜਿਹੜੇ ਜੀਵੇ ਉਹਦੇ ਵੀ ਤੁਹਾਾਰੇ ਦੀ ਬਾਰ ਬ੍ਰਹਮ ਦੇ ਜੀਵ ਸਾਰੇ ਉਹਨਾਂ ਤੇ ਸੰਤੁਸ਼ਟ ਹੁੰਦਾ ਪਰ ਉਹ ਜੋ ਕਹਦੇ ਨੇ ਬੋਲਦੇ ਨੇ ਉਹ ਸੰਤੁਸ਼ਟ ਹੁੰਦਾ ਵੀ ਹਾਂ ਠੀਕ ਬੋਲਦੇ ਕਿਸੇ ਗੱਲ ਦਾ ਉਹਨੂੰ ਇਤਰਾਜ ਨਹੀਂ ਹੁੰਦਾ। ਵਾਸਪ੍ਰਭੂ ਨਾਲੇ ਕਿਸੇ ਵੀ ਅ ਕਟੁੱਟ ਤੋਂ ਕਿਸੇ ਵੀ ਕਾਬੂ ਤੋਂ ਉਹ ਉਹਨੂੰ ਕੋਈ ਇਤਰਾਜ ਦੱਸਣ ਜੋ ਇਹਨਾਂ ਨੂੰ ਕਰਨਾ ਚਾਹੀਦਾ ਉਹ ਕਰ ਰਹੇ ਨੇ ਉਸ ਹਾਂ ਗੁਰਚਰ ਨਹੀਂ ਕਰ ਜਿਹੜੇ ਹੋਰ ਲੋਕਾਂ ਗੁਰਚ ਗੁਰਬਾਨੀ ਨਾਲ ਜੋੜ ਨੇ ਜਿਹੜੇ ਹੋਰਨਾਂ ਨੂੰ ਵੀ ਗੁਰਬਾਨੀ ਨਾਲ ਜੋੜਦੇ ਨੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਉਹ ਗੁਰੂ ਤਾਂ ਸ੍ਰੀ ਗੋਬਿੰਦਿਆ ਇਹ ਕਿਹੜੀ ਗਲਤੀ ਅਸੀਂ ਦਾਸ ਤੋਂ ਵੱਡਾ ਹੀ ਕੋਈ ਨਹੀਂ ਹੈ ਸੋ ਗौरा ਹੋਏ ਉਸ ਬੁੱਧ ਦੇ ਨਿਵੇ ਤਾਂ ਹੁੰਦਾ ਧਰਤੀ ਦਾ ਸਭ ਤੋਂ ਦੇਵੀ ਜਗਾ ਇਸ ਬੁੱਧ ਰੋਦਾ ਉੱਚੇ ਤੋਂ ਤਾਂ ਬਰਫੇ ਗੜਦੀ ਹੈ ਪਾਣੀ ਹੋਇਆ ਤਾਂ ਥੱਲੇ ਉਹ ਗੁਰੂ ਦਾ ਅੰਕਾਰ ਦਾ ਪ੍ਰਤੀਕ ਹੈ ਗੁਰੂ ਨੂੰ ਚ ਗੁਰੂ ਜੀ ਨਾਲ ਕਿੰਦਲੇ ਸਾਈ ਤੇ ਗੁਰੂ ਕੀ ਜਾਤੇ ਪਰ ਬਣ ਜਾਏ ਉਹਨੂੰ ਕੀ ਪਤਾ ਸੀ ਉਹਦੇ ਵਿੱਚ ਪਾਸティング ਗੱਲ ਸਿੱਖ ਚਪਕਾਵੇ ਵਿਚਾਰੇ ਅਨ ਪੜ੍ਹ ਸੀ ਕਿਹ ਹੈ ਕਿਹਾ ਕਿਆ ਵੀ ਦੋੜ ਕਦੀ ਵੜਿਆਈ ਹੁੰਦੀ ਹੈ ਉਹਨਾਂ ਨੂੰ ਚੱਕੀ ਲੱਗੀ ਉਸ ਵੇਲੇ ਉਹ ਚੁੱਪ ਕਰਕੇ ਗਿਆ ਲੋੜ ਘਰ ਦਾ ਦਾਸ ਹੈ ਕਰ ਕਿਰਪਾ ਹੰਤਾਇ ਰਖਾਏ ਕਿਰਪਾ ਹਵਲਕੇ ਕਰ ਕਰਪਾ ਨਹੀਂ ਹੈ ਸੰਕਾ ਹੋ ਗੋ ਬਿੜੀਗਾ ਤੇਰੀ ਦਾਸ ਬਣ ਗਿਆ ਐਸੀ ਕਿਰਪਾ ਕਰੀ ਮੇਰੀ ਲਾਜ ਕਰ ਬੇਜੇ ਤਾ ਕਿਰਪਾ ਕਰਤੀ ਕਰੀ ਕਿਰਪਾ ਲਗਦਾ ਕਿਰਪਾ ਹਾਂਜੀ ਫਿਰ ਤਾਂ ਕਰ ਦਿੱਤੀ ਵੀ ਜੇ ਕਿਰਪਾ ਹੋ ਚੁੱਕੀ ਹਰਨੇ ਮੇਰੀ लाज ਰੱਖ ਲਈ ਹਾਂਜੀ ਹਾਂ ਮੇਰੀ ਤਾਂ ਰੱਖ ਲਈ ਠੀਕ ਹੈ ਜੀ ਖੜਕ ਹੈ ਖੜਕੇ ਖੜਕ ਵਿਹਾਈ ਹਉਮੈ ਵੱਡਾ ਰੋਗ ਹੈ ਮਰ ਜਮੈ ਆਵੇ ਜਾਏ ਹਰ ਆਪਾ ਕਹਿਣਾ ਵੀ ਖੜਕ ਪਈ ਹਾਂ ਹੋ ਗਿਆ ਹਾਂਜੀ ਉਹਦੇ ਅੰਦਰ ਦਾ ਜਗੜਾ ਜਗੜੇ ਨੇ ਭਾਈ ਕਿਲੇ ਵਿਦਵਾਨ ਵੀ ਆਪ ਦੇ ਪੁੱਤ ਜਿਹੜਾ ਦਾ ਦਿਲਚਸਪ ਬਾਦੀ ਦਿਲਚਸਪ ਇਹ ਬਾਦ ਵਿਵਾਦ ਦਾ ਹੁਕਮ ਬਈਆ ਗੁਰਬਾਨੀ ਤੇ ਚਾਰ ਦਾ ਹੁਕਮ ਕਿਲੇ ਕਾਰੀ ਨੇ ਉਹਨਾਂ ਦੇ ਅੰਦਰ ਬਾਦ ਵਿਵਾਦ ਹੁੰਦਾ ਉਹਨਾਂ ਦੀ ਘੜਤੀ ਹੈ ਆਪਾਂ ਵਿਰੋਧੀ ਗੱਲਾਂ ਕਰਦੇ ਨੇ ਉਹਨਾਂ ਦੇ ਕਰੇ ਨੇ ਕੁਰਪੁਰਾ ਕੋਈ ਕਿਸਾਨਾਂ ਨਾਲ ਝਗੜਾ ਨਹੀਂ ਵੀਰ ਕੈ ਨੂੰ ਹੋ ਰਹਾ ਝਗੜਾ ਰਹਾ ਨ ਕੋਈ ਉਹ ਪੰਡਤ ਭੁੱਲਾ ਸਾਡੇ ਤੋਂ ਨੇ ਪਾਇਆ ਹੋਇਆ ਜਿੱਕੀ ਸੀ ਠੀਕ ਹੈ ਵੀ ਗਏ ਹਾਂਜੀ ਹਮੇਂ ਅੱਗੇ ਗੱਲ ਤੇ ਹੈ ਹਾਂਜੀ ਪੁਜਾਰੀ ਔਰ ਧਾਰੀ ਉਮਰ ਜੇ ਵਿਦਵਾਨ ਨੇ ਨੇ ਜਿਹੜੇ ਜਿਹੜੇ ਪ੍ਰੈਸਟੀਜ ਸ਼ੂ ਬਣਾ ਲੈਂਦੇ ਨੇ ਨਾ ਘਰ ਬਦੂ ਉਹ ਹੋ ਸਕਦੇ ਨੇ ਗਰੂਤ ਦੀ ਹੋ ਸਕਦੇ ਐਟਾ ਪ੍ਰੈਸਟੀਜ ਜੂਰੀ ਜੇ ਮੈਨੂੰ ਕਿਸੇ ਨਾਲ ਦਾ ਨਹੀਂ ਪਤਾ ਤੋ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਦੰਦਾਂ ਨੂੰ ਹੀ ਪਤਾ ਲੱਗਿਆ ਗੱਦਾ ਕੀ ਐ ਛੜਤੀ ਠੀਕ ਐ ਜੀ ਉੱਤਮ ਪਦਮੀ ਪਾਲੀ ਪਦਮੀ ਵੀ ਉੱਤਮ ਪਤਾ ਹੀ ਨਹੀਂ ਲੱਗਿਆ ਕਿਵੇਂ ਉਹ ਛੜਤੀ ਕੋਈ ਚਰਚਾ ਹੀ ਨਹੀਂ ਕੀਤੀ ਉਹਦੇ ਨੇ ਕੋਈ ਚਰਚਾ ਹੀ ਨਹੀਂ ਕੀਤੀ ਗੁਰਨਾਮ ਸਿੰਘ ਰਹੇ ਕਹਿੰਦੇ ਵੀ ਰੱਖਣ ਨੂੰ ਚੱਲਿਆ ਦੇਖਿਆ ਵੀ ਉਹਦਾ ਦਰੋ ਸਕਦਾ ਕਿ ਆ ਰਹਾ ਹੁਮੇ ਵੱਡਾ ਰੋਗ ਹੈ ਮਰ ਜੰਮੇ ਜਾਏ। ਹੁਮੇ ਵੱਡਾ ਰੋਗ ਹੈ। ਹੁਮੇ ਤਾਂ ਵੱਡਾ ਤਾਂ ਕੋਈ ਰੋਗ ਨਹੀਂ ਹੈ। ਪਰ ਜੰਮੇ ਆਵਾ ਜਾਇ ਹਰ ਜਨਮ ਤੇ ਨਾਲੇ ਜਾਂਦਾ ਹੈ। ਸਾਰੇ ਫਿਰ ਪੈਦਾ ਹੋ ਜਾਂਦਾ ਵੱਡਾ ਰੋਗ ਹੁੰਦੇ। ਪਰ ਜੰਮੇ ਆਵਾ ਜਾਇ ਜਪਰ ਮਰਦਾ ਕਾਰਨ ਰਹੂ ਹੁੰਦੇ। ਕਰਕੇ ਹੀ ਹੈ ਇਹਨਾਂ ਦੀ। ਆ ਜਿਹੜੀ ਉੱਪਰ ਫੜਕਾ ਹੁੰਦਾ ਹੈ ਨਾਲੇ। ਇਹ ਗੋਬੇ ਉੱਧਰ ਖੜਦਾ ਹੈ ਇਹ ਤਾਂ ਰੋਗ ਹੈ ਹਾਂਜੀ ਜਿਨ ਕੋ ਪੂਰਵ ਲਿਖਿਆ ਤੈਨਾਂ ਸਤਿਗੁਰ ਮਿਲਿਆ ਪ੍ਰਭ ਆਈ ਜਿਨ ਕੋ ਪੂਰਵ ਲਿਖਿਆ ਜਿਹਨਾਂ ਨੇ ਜਾਂ ਚਲੇ ਗਾਲੇ ਤੇ ਹਰ ਬੰਨਣ ਕੋ ਬੀਚੇ ਅੜ ਗਿਆ ਚੀਤ ਜਦੋਂ ਹਾ ਧਾਰਮ ਗੀਤਾ ਕਿਹੜਾ ਧਰਮ ਟਾਲ ਕਰਦਾ ਕਾਹਦੇ ਵਾਸਤੇ ਕਰਦਾ ਪ੍ਰਭੂ ਗਿਰਨ ਸੁਖ ਦੀ ਵਾਸਤੇ ਧਰਮ ਦੀ ਪ੍ਰਾਪਤੀ ਵਾਸਤੇ ਜਨਮ ਗੁਜ਼ਾਰੋ ਕੱਟਣ ਨੇ ਪੂਰਵ ਦੇ ਵਿੱਚ ਇਹ ਲਿਖਿਆ ਸੀ ਕਿ ਜਨਮ ਮਰਨ ਕੱਟਣ ਹੀ ਕੱਟਣ ਇਹਨਾਂ ਸਤਗੁਰੂ ਮਿਲਿਆ ਪ੍ਰਭਾਏ ਉਹਨਾਂ ਨੂੰ ਬੜ ਜਾਂਦਾ ਜਿਨ੍ਹਾਂ ਦੇ ਇਹ ਹੈ ਵੀ ਗੱਡੀਆਂ ਆਕਾਰਾਂ ਐਸੀ ਵਿਸ਼ਰਤ ਹੈ ਸੱਤ ਬਣ ਕੇ ਇਹ ਲਿਖਿਆ ਆ ਉਹਨਾਂ ਨੂੰ ਰੂਪ ਗਿਆ ਠੀਕ ਹੈ ਜੀ ਇਹਦਾ ਭਾਵ ਦੱਸੋ ਜੀ ਤੈਨਾ ਸਤਗੁਰੂ ਇੱਕ ਦਾ ਸਤਗੁਰ ਅੱਖਰ ਤੇ ਸਿਆਰੀ ਨਹੀਂ ਇੱਥੇ ਤੈਨਾ ਮਿਲਿਆ ਪ੍ਰਭ ਆਏ ਫਰਬਰ ਸਤਗੁਰ ਦਾ ਦੱਸੋ ਕੀ ਭਾਵ ਆਏ ਸਤਗੁਰੂ ਦੇ ਉਹ ਕਹਦਾ ਇਹ ਸਤਗੁਰ ਜਿਹੜਾ ਪੁਰਖ ਬਾਚਕਾ ਲਓ ਹਾਂਜੀ ਕੋਈ ਰਾਹ ਦੱਸਣ ਵਾਲਾ ਜਾਂਦਾ ਪ੍ਰਭ ਵੱਡਾ ਹੀ ਹੁੰਦਾ ਪ੍ਰਭ ਨੂੰ ਵੱਡੇ ਨੂੰ ਕਹਿੰਦੇ ਨੇ ਅੱਛਾ ਜਿਹੜੇ ਦੁਨੀਆਂ ਦੇ ਸਤਗੁਰ ਨੇ ਨਾ ਉਹਨਾਂ ਨੂੰ ਵੱਡਾ ਹੁੰਦਾ ਸਾਰਿਆਂ ਨੂੰ ਅੱਛਾ ਜੀ ਦੁਰੀਆ ਤਾਂ ਗੁਰੂ ਬਣੇ ਫਿਰਦੇ ਇਹਦੇ ਹੋਰ ਉਹ ਦੁਰੀਆ ਦੇ ਕਿੰਨੇ ਧਰਮ ਦੇ ਉਨਾ ਜੋ ਪ੍ਰਾਪਾਅ ਹੋ ਜਿਹੜਾ ਵੱਡਾ ਹੈ ਸਾਰਿਆਂ ਨੂੰ ਆ ਉਹ ਪ੍ਰਬੋਧ ਜਿਹੜਾ ਲਫਜ਼ ਹੈ ਨਾ ਪ੍ਰਬੋਧ ਉਹਦੇ ਕੋ ਗਿਆਨ ਪ੍ਰਬੋਧ ਕਿੱਡਾ ਹੀ ਕਿਸੇ ਕੋ ਗਿਆਨ ਹੋਵੇ ਉੱਤੇ ਛਾੜ ਦਿੰਦਾ ਆਪਣਾ ਗਿਆਨ ਜਿਹੜਾ ਇਹ ਤਤ ਗਿਆਨ ਹੈ ਨਾ ਇਹ ਹਰੇਕ ਨੂੰ ਪ੍ਰਬੋਧ ਸੋਪਟ ਦਿੱਤ ਜੋ ਮਨ ਪ੍ਰਬੋਧਾ ਅੰਦਤ ਕੋ ਮਨ ਗਿਆਨ ਪੂਰਾ ਨਹੀਂ ਹੁੰਦਾ ਨੁਰੂ ਗਿਆਨ ਦੀ ਲੋੜ ਹੈ ਗੁਰਮੁਖ ਦਾ ਜਿਹੜਾ ਜਿਹੜਾ ਬੰਦਾ ਹੈ ਨਾ ਉਹ ਇਹ ਕਿੰਨਾ ਗਿਆਨ ਹੁੰਦਾ ਜਿਵੇਂ ਤਾਰੂ ਆਪਾ ਜਿਹਨਾਂ ਦੇ ਤਾਰੂ ਪਰ ਆ ਗਿਆਨ ਦੀ ਹੁੰਦਾ ਉਹਨਾਂ ਚ ਪ੍ਰਬੋਧ ਦੀ ਲੋੜ ਹੈ ਜਿੰਨਾ ਚਿਰ ਅੰਦਰ ਭਰਮਾ ਹੁੰਦਾ ਜਰ ਬੋਧ ਦੀ ਲੋੜ ਹੈ ਉਹ ਦੋਸੇ ਕੋ ਹੈ ਪਰ ਬੋਲ ਲੋੜ ਹੈ ਇਹ ਹੋਰ ਬੋਧ ਨੂੰ ਹੋਣੀ ਹੈ ਪ੍ਰਬੋਧ ਵੱਧ ਜਣੀ ਉਨੇ ਬੋਧ ਦੇ ਉੱਤੇ ਬੋਧ ਹੋਰ ਹੋ ਜਾਂਦੇ ਠੀਕ ਹੈ ਜੀ ਨਾਨਕ ਗੁਰਪ੍ਰਸਾਦ ਉਪਰੇ ਹਮੇ ਸ਼ਬਦ ਜਲਾਇ ਨਾਨਕ ਗੁਰਪ੍ਰਸਾਦ ਦੀ ਕਿਰਪਾ ਨਾਲ ਉਪਰੇ ਤੇ ਜਿਹੜੇ ਆਦਮੀ ਦੀ ਕਿਰਪਾ ਨਹੀਂ ਹੋ ਸਕਦੀ ਕਿਸੇ ਤੇ ਪਰ ਦੀ ਕਿਰਪਾ ਹੁੰਦੀ ਹੈ ਇੱਥੇ ਗੁਰਪ੍ਰਸਾਦ ਹੈ ਜਿਹਨੂੰ ਮਿਲ ਗਿਆ ਜਿਹਨੂੰ ਗੱਲ ਸਭ ਆ ਗਈ ਤਲਵਤ ਵੀ ਰਿਹਾਉਂਦੇ ਠੀਕ ਹੈ ਜੀ ਹੌਮੀਦੂ ਗਿਆ ਚਾਰ ਗਿਆ ਉਹ ਉੱਪਰ ਗਿਆ ਗਿਆਨ ਦੀ ਕਿਰਪਾ ਨਾਲ ਬਣ ਕੇ ਗਿਆਨ ਦਾ ਵੱਡਾ ਬਣ ਰਿਹਾ ਹੈ ਦੇਖੋ ਇੱਥੇ ਰਾਹਾ ਮੁਕਤਾ ਹੈ ਗੁਰਪ੍ਰਸਾਦ ਵਿੱਚ ਹਮੇਸ਼ਾ ਮੁਕਤਾ ਹੀ ਆਏਗਾ ਜੀ ਹਾਂ ਜੀ ਨਾਨਕ ਗੁਰਪ੍ਰਸਾਦ ਦੀ ਉੱਭਰ ਹੈ ਤੇ ਉਹੀ ਗੁਰ ਪ੍ਰਸਾਦ ਨਾਲ ਹਉਮੈ ਸ਼ਬਦ ਜਲਾਏ ਹੈ ਜੀ ਆ ਗਿਆਨ ਨਾਲ ਹਉਮੈ ਸ਼ਬਦ ਜਰਨ ਨਹੀਂ ਆ ਰਿਹਾ ਵੈਸੇ ਹਉਮੈ ਸ਼ਬਦ ਜਲਾਏ ਹਉਮੈ ਸ਼ਬਦ ਜਲਾਏ ਹਰੇਕ ਸਲੋਕ ਚ ਆ ਰਿਹਾ ਲਗਭਗ ਉਹ ਵੀ ਕਾਰਨ ਸਾਰੇ ਸੱਤਾਂ ਇਹ ਗੜਾ ਕੀਤਾ ਹੋਇਆ ਹੋਰ ਹੈ ਜੀ ਤੇ ਸ਼ਬਦ ਤੋਂ ਬਿਨਾਂ ਵਿਰੋਧ ਹੈ ਹਾਂ ਜੀ ਸ਼ਬਦ ਤੋਂ ਬਿਨਾਂ ਹਮੇਂ ਜਲਦੀ ਨਹੀਂ ਹੈ ਬਿਲਕੁਲ ਵੀ ਜਲਦੀ ਬਿਲਕੁਲ ਹੋਰ ਕੋਈ ਤਰੀਕਾ ਹੀ ਨਹੀਂ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਵਿਧਾਤਾ ਹਰ ਨਾਮ ਹਮ ਸਰੇਵੈ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਤ। ਉਹ ਇੱਕ ਇੱਕ ਹੁਕਮ ਦੀ ਗੱਲ ਆ ਗਈ। ਅੱਛਾ ਜੀ। ਹਰ ਨਾਮ ਮਹਾਰਾ ਪ੍ਰਭ ਸਾਗਰ ਗਿਆਨ ਦੀ ਗਾਂ ਲੋੜ ਨਹੀਂ ਐ। ਅਭ ਉਹ ਉਹਦਾ ਉਹਦੇ ਕੋਲ ਇੰਨਾ ਗਿਆਨ ਹੈ ਉਹਨੂੰ ਹੋਰ ਗਿਆਨ ਦੀ ਕਿੱਦੋਂ ਲੋੜ ਨਹੀਂ ਐ। ਉਹਦਾ ਜੀ ਗਿਆਨ ਦੀ ਕਦੇ ਹੋਈ ਨਹੀਂ। ਕਿਸੇ ਪੱਖ ਤੋਂ ਵੀ ਕਿਸੇ ਪੱਖ ਸਾਰੀ ਸ੍ਰਿਸ਼ਟੀ ਦੀ ਰਚਨਾ ਉਹਨੇ ਕੀਤੀ ਹੈ ਹੋਈ ਹੈ ਨਾ ਜਨੂ ਸਾਡੀ ਅਕਲ ਕਲਾ ਭਰਪੂਰ ਹੈ ਅਕਲ ਕਲਾ ਭਰਪੂਰ ਹੈ ਅਭਿਗਟ ਅਭੋਚਰ ਹੁੰਦਾ ਹੈ ਬੁੱਧੀ ਤੋਂ ਬਦਿਆ ਬਦੁਖੀ ਬੁੱਧੀ ਨਹੀਂ ਉਹਨੂੰ ਸਮਝ ਸਕਦੀ ਉਹ ਕਿਸੇ ਦੇ ਗੋਚਰੇ ਨਹੀਂ ਆ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ ਉਹਨੂੰ ਸਲਾਹ ਨਹੀਂ ਲੈਣੀ ਪੈਂਦੀ ਆਮਨਤੀ ਆਮਨਤੀ ਵੀ ਆ ਉਹ ਵਿਗਿਆਤ ਪਰ ਪਰਖੀ ਪਰਖ ਤੇ ਜਾਂਦਾ ਹੈ देखो ਪਰਖਾ ਵਧਾ ਗਿਆ ਖੱਖੇ ਰੂਪ ਕੋ 1 ਵਜੇ ਉਹ ਹੀ ਵਧਾਤਾ ਪੁਰਖ ਹੈ ਉਹ ਦਾਤਰ ਵਿਧੀਆਂ ਨੇ ਨਾ ਸਾਰੀ ਹੋਈ ਵਿਧੀ ਹੈ ਛੁੱਟਣ ਕੀ ਵਿਧੀ ਉਹਦੇ ਕੋਲ ਆਈ ਹੋਈ ਹੈ ਹਾਂ ਜਿਹੜੀਆਂ ਦੁਈਆਂ ਬਿਧੀਆਂ ਆ ਨਾ ਛੋਟੀਆਂ ਉਹ ਵੀ ਇਹਦੇ ਵਿੱਚ ਹੀ ਸਮਾ ਜਾਂਦੀਆਂ ਨੇ ਫਿਰ ਆ ਕੇ ਛੋਟੀਆਂ ਬਿਧੀਆਂ ਨੇ ਉਹਨਾਂ ਦੀ ਛੋਟੀ ਤੇਜ ਹੈ ਤਦ ਹੈ ਹਰ ਕਿਸਮ ਦਾ ਗਿਆਨ ਉਤੋਂ ਹੀ ਮਿਲਿਆ ਜਿਹਨੂੰ ਮਿਲਿਆ ਠੀਕ ਹੈ ਜੀ ਇਹ ਹੁਕਮ ਦੀ ਉਹ ਗੱਲ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਬਿਲਕੁਲ ਠੀਕ ਹੈ ਜੀ ਹਰ ਨਾਮ ਹਮ ਸ੍ਰੇਵ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਕੀ ਕਰਦਾ ਠੀਕ ਹੈ ਜੋ ਚਲਾਏ ਤੇ ਮੈਂ ਚੱਲਾਂ ਹੋਮੀ ਉਹ ਕਾਗਾਂ ਪਾਸੇ ਹੀ ਲੱਗਦੇ ਚਲਾਉਣਾ ਮੈਂ ਹਾਂ ਸਰੇਵਤ ਆ ਪੂਜਾ ਤਨਮਨ ਤਨ ਸਭ ਨਾਮ ਨੂੰ ਆਪਿਆ ਹੋਇਆ ਹੈ ਸਾਡਾ ਸਭ ਕੁਝ ਸਾਲੂ ਬਨਾਰਪੂ ਪੂਜੜਾਉਂ ਹਰਨਾਮੇ ਹੀ ਬਨਾਤਾ ਵਾ ਜਿਹੜਾ ਹਰ ਲੋਭ ਦੇ ਰੰਗ ਗਿਆ ਹੈ ਹਰਨਾਮ ਦਾ ਇਹ ਰਸ ਹੈ ਬੰਦੂ ਚੜਿਆ ਹੋਇਆ ਰੱਗ ਠੀਕ ਹੈ ਜੀ ਹਰਨਾਮੇ ਜੇਵੜ ਕੋਈ ਅਵਰਨਾ ਸੁਝੇ ਹਰਨਾਮੋਂ ਅੰਤ ਛੜਾਤਾ ਗੱਲ ਕੀ ਹੈ ਕਿਉਂ ਨਾ ਕੋ ਛੇ ਕਿਉਂਕਿ ਦੁਨੀਆ ਵਿੱਚ ਸਾਨੂੰ ਹਰ ਦੇ ਬਰਾਬਰ ਕੋਈ और सुजदा ही नहीं और साथ गौर में कोई है बराबर भी छत्ती नाम दे केवल कोई और छत्ती दुनिया में नहीं है नामो अंत कहता क्योंकि अंत वेड़े नाम ली जरूर ठीक है जी ਠੀਕ ਹੈ ਜੀ ਹਰਨਾਮ ਦੀਆ ਗੁਰ ਪਰਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਹੋਰ ਉਹਨ ਸਤਗੁਰ ਜਦ ਪਰਥਾਈ ਆ ਗੁਰ ਪਰਉਪਕਾਰੀ ਆਏ ਜਦ ਪਰਉਪਕਾਰੀ ਆਏ ਨੇ ਇਹ ਪਹਿਲਾ ਬਿਦੂ ਦਾ ਗਿਆਨ ਦਿੰਦਾ ਹੈ ਵੀ ਗਿਆਨ ਇਹ ਉਹ ਵੀ ਨਾਮ ਨਵਦੀਆ ਵਰਤ ਸਭ ਵਰ ਪਰਪਕਾਰੀ ਤਾਰਨਾ ਤਾਰਨਾ ਗੁਰੂ ਦਾ ਪਿਤਾ ਮਾਤਾ ਉਹ ਗੁਰੂ ਕਾ ਹੈ ਉਹ ਗੁਰੂ ਦਾ ਪਿਤਾ ਮਾਤਾ ਹੈ ਗੁਰੂ ਦੀ ਮਾਤਾ ਪਿਤਾ ਮਾਤਾ ਸਦਾ ਗੁਰੂ ਗੁਰੂ ਸ਼ਬਦ ਗੁਰੂ ਹੋ ਗਿਆ ਉਹ ਕਿਹਾ ਗੁਰੂ ਮਾਤਾ ਪਿਤਾ ਗੁਰੂ ਤੇ ਗੁਰੂ ਮਾਤਾ ਪਿਤਾ ਕੋਈ ਨਹੀਂ ਐਸਾ ਪਰ ਆਪ ਨਹੀਂ ਕਹਿਆ ਕਿ ਹੈ ਮਾਤਾ ਪਿਤਾ ਉਹ ਗੁਰ ਉਹਦੇ ਨਾਲ ਸਿਆਰੀ ਆਈ ਹੋਈ ਹੈ ਹਾਂਜੀ ਗੁਰੂ ਨਾਲ ਲੈਂਕੜੇ ਆਏ ਹੋਏ ਦੀ ਬਤਾ ਤਾ ਕਨਕਾ ਉਹ ਤੱਟ ਤੱਟ ਰੋਟਾ ਕੌਣ ਗੁਰੂ ਕਾ ਉਹ ਗੁਰੂ ਕਾ ਹੈ ਗੁਰੂ ਦੀ ਕਹਾਏ ਹੈ ਗੁਰੂ ਕੇ ਕਹਾਏ ਨਾਨਕ ਗੁਰੂ ਕਾ ਹੈ ਪ੍ਰਗਤ ਗੁਰੂ ਕਾ ਹੈ ਸਾਰੇ ਗੁਰੂ ਕੇ ਨੇ ਗੁਰੂ ਦੀਆਂ ਗੁਰੂ ਕਾ ਗੁਰੂ ਕਾ ਪਿਤਾ ਮਾਤਾ ਵੀ ਗੁਰੂ ਆ ਉਹਦਾ ਤਾਲ ਗੁਰੂ ਕਾ ਉਹ ਗੁਰੂ ਕਾ ਸਤਿਗੁਰ ਮਾਤਾ ਉਹਦਾ ਗੁਰੂ ਹੈ ਪਰਮੇਸ਼ਰ ਹੈ ਹਾਂਜੀ ਹਾਂ ਸਤਗੁਰ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲਿਐ ਹਰ ਨਾਮ ਮੈਂ ਜਾਪਾਂ ਗਾਂ ਇਹ ਆਪਣਾ ਸਤਗੁਰ ਵਖਰਾ ਵਖਰਾ ਹੋ ਗਿਆ ਜਿਹਨੇ ਮੈਨੂੰ ਉਪਦੇਸਿਆ ਮੇਰਾ ਸਤਗੁਰ ਹੈ ਜਿਹਨੂੰ ਜਿਹਨੇ ਤੇਰੇ ਉਪਦੇਸਿਆ ਉਹ ਉਹਦਾ ਸਤਗੁਰ ਮੈਂ ਸਤਗੁਰ ਆਪਣੇ ਕੋਲ ਸਦਾ ਨਿਸ਼ਤਾਨੀ ਮੈਂ ਆਪਣੇ ਸਤਗੁਰਾ ਕੇ ਸਦਾ ਨਤਮਸਤਕ ਹਾਂ ਸਦਾ ਉਹਦੇ ਦੇ ਸੱਚ ਪਾ ਕੇ ਰੱਖਦਾ ਹਾਂ ਹਰ ਗੱਲ ਉਹਦੀ ਸਤ ਸਤ ਕਰਕੇ ਮੈਂ ਕਦੇ ਉਹਦੇ ਨਾਲ ਟਕਰਾਲ ਨਹੀਂ ਆ ਮੈਂ ਕਦੇ ਉਹਦੇ ਉਹਦੀ ਕਿਸੇ ਗੱਲ ਤੇ ਬੇਤਰੋਸਾ ਨਹੀਂ ਕੀਤਾ ਕਿਰਤੂ ਪ੍ਰਤੂ ਨਹੀਂ ਕੀਤਾ ਜਿੱਤ ਮਿਲਿਆ ਹਰ ਨਾ ਮੈਂ ਜਾਤਾ ਇਹਦੇ ਗੁਨਾਹ ਨੂੰ ਮੈਂ ਹਰ ਝੜ ਲਿਆ ऐसे सतगुरु दे गुण सदा ਆਪਣੇ ਤੇਰ ਝੁਕਾ ਕੇ ਰੱਖ। ਦੀਵਚਲ ਹੋ ਕੇ ਇਹ ਗਿਆਨ ਮਿਲੇ। ਇਹ ਰਸਾ ਮਿਲੇ। ਇਹ ਵਿਧੀ ਸਮਝ ਆਈ ਹੈ। ਇੱਥੇ ਹਾਏ ਪਰ ਨੇ ਜਿਵੇਂ ਹੋਮਵਰਕ ਆਮ ਤਾਂ ਹਾਏ ਪਰ ਟਿੱਪੀ ਲੱਗਦੀ ਨਹੀਂ ਹੈ ਹੋਂ ਜਿਹੜੋਂ ਲਿਖਦੇ ਆ। ਕਿਆ ਹੱਥ ਲਿਖਤਾ ਜੁੁੱਦਾਈ ਦੀ ਸੀ ਕੀ ਲੋੜ ਪਈ ਸੀ ਤੁਹਾਨੂੰ ਇਹ ਕਰਨ ਠੀਕ ਹੈ ਜੀ ਉਹ ਵੀ ਲਿਖੀ ਜਾਂਦਾ ਇਹਨਾਂ ਨੇ 23 ਵਾਰ ਇਸ ਤਰ੍ਹਾਂ ਲਿਖਿਆ ਟਿੱਪੀ ਲਾ ਕੇ ਬਾਕੀ 755 ਵਾਰ ਤਾਂ ਬਿਨਾਂ ਟਿੱਪੀ ਤੋਂ ਲਿਖਿਆ ਹੈ ਕਾਹਨ ਹੋ ਜੂਗੀ ਸਰਾਈ ਲੈਣਗੇ ਆਪੇ ਲੈਣਗੇ ਠੀਕ ਹੈ ਜੀ ਹਾਲ ਤਾਈ ਹਾਲ ਤਾਈ ਆਪਣੀ ਆਪਣੀ ਮਰਜ਼ੀ ਚੱਲਦੀ ਰਹੀ ਹੈ ਤੁਹਾਨੂੰ ਪਤਾ ਹੀ ਪਿੱਛੇ ਕੀ ਚੱਲਦਾ ਰਿਹਾ ਹਾਂਜੀ ਠੀਕ ਹੈ ਜੀ ਇੱਥੇ 16ਵੀਂ ਪੌੜੀ ਸਮਾਪਤੀ ਹੈ ਜੀ